शलोक महला चौथा हर हर नाम तिहाए मन हर दरगा पावे मान जो इच्छा सो फल पाए सी गुरु शब्दी लगै ध्यान हर नाम हर, हर नाम तिहाए मन तू हर रे हर नाम दोहन रख अपने मूल विच ध्यान रख मूल दे नाम तक नाम मूल दे ਉਦੇ ਧਿਆਨ ਖ ਉਹਦੇ ਨਾਲ ਜੁੜਿਆ ਰਹੇ। ਤੁਰ ਤੁਰੇ ਨਾਲ ਜੋੜ ਕੇ ਰੱਖ ਫਿਰ ਪਾਸੇ ਸੁਸਤਣਾ ਲੈ ਕੇ ਜਾਇ। ਕਿਉਂ? ਤਾਂ ਕਿ ਹਰਦਰ ਦਾ ਪਾਪਹਿਮਾਨ ਤੈਨੂੰ ਹਰ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੋ ਜੇ। ਦਰਗਾਹ ਤੇਨੂੰ ਮਾਣ ਬਣੇ। ਜੇ ਤੇਰੀ ਸੁਰਤ ਜੁੜੀ ਰਹੀ ਨਾ ਉਖੜੀ ਹਰ ਦਰਗਾਹ ਤੇਨੂੰ ਮਾਣ ਮਿਲੂਗਾ। ਤੂੰ ਇੱਛਾ ਹੈ, ਜਿਹੜੀ ਤੇਰੀ ਇੱਛਾ ਉਹ ਹੀ ਮਿਲੂਗਾ, ਮਿਲ ਜਾਊਗਾ ਤੈਨੂੰ। ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਗੁਰਬਾਣੀ ਪਾਈ ਸੀ ਗੁਰ ਸ਼ਬਦੀ ਲੱਗੇ ਧਿਆਨ ਜੇ ਗੁਰ ਸ਼ਬਦੋ ਵੀ ਤਰ੍ਹਾਂ ਧਿਆਨ ਜੁੜ ਜਾਏ ਗੁਰਬਾਣੀ ਤਰ੍ਹਾਂ ਧਿਆਨ ਜੁੜ ਜਾਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਹਾਂਜੀ 'ਚ ਕੀ ਫਰਕ ਹੈ ਜੀ ਹਰ ਤਾਂ ਜੋਤ ਹੈ ਨਾਮ ਗੁਰ ਰੂਪ ਕਿਹਾ ਜਾਂਦਾ ਨਾ ਹਰ ਦੇ ਨਾਲ ਜਦ ਸ਼ਬਦ ਵੀ ਸੁਣ ਲੱਗ ਜਾਂਦਾ ਬਿਨਾਂ ਕੰਨਾਂ ਤੇ ਫਿਰ ਹਰ ਆ ਨਾਮ ਦੋ ਹੋ ਜਾਂਦਾ ਅੱਛਾ ਫੇ ਮਨ ਰਹਿ ਜਾਂਦਾ ਉਸ ਸਮੇ ਮਨ ਮਾਇਆ ਦੀ ਇੱਛਾ ਜਦ ਮਾਰ ਲੈਂਦਾ ਫੇ ਮਨ ਕਹਿੰਦਾ ਅਸੀਂ ਹੈ ਜੀ ਹੈਗਾ ਉਹ ਜਮਾਇਆ ਦੀ ਭੁੱਖੇ ਨਹੀਂ ਰਹਿੰਦੀ ਅੱਛਾ ਪਹਿਲਾਂ ਹਰ ਚ ਧਿਆਨ ਰੱਖਣਾ ਫੇ ਉਤੋਂ ਗਾਹ ਹਰਨਾਮ ਚ ਧਿਆਨ ਚਲੇ ਜਾਊਗਾ ਪ੍ਰਗਟ ਹੋਣਾ ਅੱਛਾ ਹੋਣਾ ਹੈ ਹਰਨਾਮ ਫੇ ਚੌਥਾ ਪਦਾਰਥ ਹੈ ਜੀ ਆ ਚੌਥਾ ਪਦਾਰਥ ਨਾਮ ਨੰਬਰ 4 ਚੌਥਾ ਨਹੀਂ ਹੈ। اچھا ਪਹਿਲਾਂ ਹਰ ਦੇ ਵਿੱਚ ਧਿਆਨ ਰੱਖਣ ਨਾਲ ਦੋ ਪ੍ਰਾਪਤ ਹੈ ਫਿਰ ਉਸ ਤੋਂ ਬਾਅਦ ਚਾਰ ਪ੍ਰਾਪਤ ਹੋ ਜਾਣਗੇ ਹਾਂਜੀ। ਹਾਂ ਫਿਰ ਚਾਰ ਹੋਣੇ ਜਨਮ ਪਦਾਤ ਨਾਲੇ ਮਿਲੂਗਾ ਨਾਮ ਦੇ ਨਾਲ ਜਨਮ ਮਿਲੂਗਾ। ਠੀਕ ਹੈ ਫਿਰ ਦਰਗਾਹ ਦੇ ਵਿੱਚ ਸਤਖੰਡ ਚ ਮਾਨ ਮਿਲੂਗਾ ਹਾਂਜੀ। ਹਾਂ ਤਾਂ ਹੀ ਮਿਲੂਗਾ। ਜੋ ਇੱਛਾ ਸੋ ਫਲ ਪਾਈ ਸੀ ਗੁਰ ਸ਼ਬਦੀ ਲੱਗੇ ਧਿਆਨ। ਜੋ ਚੇਸੋ ਪਣ ਪਾਈ ਸੀ ਜਿਹੜੀਆਂ ਤੇਰੀਆਂ ਛਾਵਾਂ ਨੇ ਸਾਰੀ ਪੂਰੀਆਂ ਹੋ ਜਾਣੀਆਂ ਤੇ ਤੇਰਾ ਗੁਰ ਸ਼ਬਦ ਨਾਲ ਧਿਆਨ ਅਜਿ ਗੁਰਬਾਣੀ ਨਾਲ ਧਿਆਨ ਨਾਲ ਚੱਲਿਆ ਚੁੱਪ ਕਰ ਤੇ ਜੇ ਇਹ ਹੀ ਗਾਂ ਜਾਊਗਾ ਇਹ ਵੀ ਇਹੀ ਕਹਿੰਦੀ ਧਿਆਨ ਨਾਲ ਇਹੀ ਕਿ ਗੁਰਬਾਣੀ ਕਿਹਾ ਹਰ ਦੇ ਧਿਆਨ ਰੱਖ ਹਰ ਹਿਰਦੇ ਚ ਹਰ ਜੱਪ ਹਿਰਦੇ ਬਾਣੇ ਹਾਲੇ ਹਿਰਦੇ ਚ ਹਲਣਾ ਧਿਆਨ ਦਾ ਕੋ ਹਿਰਦੇ ਧਿਆਨ ਲੱਖ ਅੰਤਰਬੁਖੀ ਰਹੇ ਫੇਰ ਕੁੜੀ ਛੱਡ ਦੇ ਛੱਡੀਆਂ ਰੱਖ ਤੇ ਛੱਡੀ ਰੱਖਿਆ ਤੈਨੂੰ ਤੇ ਨਾਮ ਸੁਣ ਜਾਣਾ ਨਾਮ ਪ੍ਰਗਟ ਹੋ ਜਾਣਾ ਚਾਰੇ ਪਾਸੇ ਸੁਣ ਜਾਣਗੇ ਠੀਕ ਹੈ ਜੀ ਕਿਲਵਿਖ ਪਾਪ ਸਭ ਕੱਟੀਆਂ ਹੋਮੈ ਚੂਕੈ ਗੁਮਾਨ ਗੁਰਮੁਖੀ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਮਾਇਆ ਕਰ ਤੈਨੂੰ ਜਿਹੜੀਆਂ ਇੱਛਾਵਾਂ ਨੇ ਕਿਲ ਵਿਖਲੇ ਕਿਲ ਬੁੱਧੀਆ ਚਿੰਤਾ ਕਿਲ ਚਿੰਤਾ ਵੇਖ ਮਾਇਆ ਕਰਕੇ ਮਾਇਆ ਕਰਕੇ ਜਿਹੜੀਆਂ ਚਿੰਤਾਵਾਂ ਪੈਦਾ ਹੁੰਦੀਆਂ ਤੈਨੂੰ ਤੇ ਪਾਪ ਹੈ ਹਸਨ ਚ ਇਹ ਸਭ ਕਟੀਆਂ ਨੂੰ ਆਪਣੇ ਰੱਤੇ ਜਾਣਗੇ ਜੇ ਧਿਆਨ ਰਹੂਗਾ ਉੱਤੇ ਮਨ ਸਮਝਾ ਕੇ ਰੱਖ ਕਟੀਆਂ ਹੋ ਗਏ ਚੁੱਕੇ ਗਵਾਨ ਕੋ ਕਾਰਨ ਜਾਣ ਗਵਾਨ ਹੁੰਦਾ ਮੈਂ ਐ ਕਰ ਸਕਦਾ ਮੈਂ ਐ ਕਰ ਦੂੰਗਾ ਇਕ ਗੁਵਾਨ ਠੀਕ ਹੈ ਜਦੋਂ ਮੈਂ ਆਪਣਾ ਵजूद ਦਾ ਖਾਨਮੈਂ ਜੋ ਕਰ ਦੂੰਗਾ ਜੋ ਕਰ ਸਕਾਂ ਉਹ ਗੁਵਾਨ ਗੁਰਮੁਖ ਕਮਲ ਵਿਖਿਆ ਗੁਰਮਖਾ ਦਾ ਕਮਲ ਵਿਖਿਆ ਹੁੰਦਾ ਕੋਈ ਖੜਿਆ ਆਇਆ ਹੁੰਦਾ ਸਭ ਆਤਮਾ ਬ੍ਰਹਮ ਪਛਾਣ ਸਭ ਦੇ ਵਿੱਚ ਆਤਿ ਆਤਮਾ ਦੇ ਵਿੱਚ ਬ੍ਰਹਮ ਪਛਾਣਿਆ ਹੋਇਆ ਹੁੰਦਾ ਸਭ ਆਤਮਾ ਦੇ ਵਿੱਚ ਬ੍ਰਹਮ ਹੈ ਛੱਟ ਘਟਨਾ ਹਰ ਜੂ ਬਸ ਕਟਕੀ ਹੈ ਕਟ ਆਤਮਾ ਬੇਟਾ ਬ੍ਰਹਮਾ ਸਮਝ ਉਹ ਪਛਾਣ ਲੈਣੇ ਹਾਂਜੀ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ اے ਹਰ ਕਿਰਪਾ ਧਾਰ ਕਿਰਪਾ ਕਰ ਜਨ ਨਾਨਕ ਜਪ ਜਪੀ ਹਰ ਲੋਗ ਜਿਹੜੇ ਤੇਰਾ ਜਾਨਾ ਨਾਨਕ ਜਿਹੜੇ ਤੇਰਾ ਜਾਨਾ ਇਹ ਨਾਮ ਨੂੰ ਜਪ ਲਵੇ ਸਮਝ ਲਵੇ ਗੁਰਬਾਣੀ ਕੀ ਲਿਖਿਆ ਗੁਰਬਾਣੀ ਦੀ ਸੋਚੀ ਇਹਨੂੰ ਆਏ ਹੋਏ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਕੋ ਪੂਰਬ ਲਿਖਿਆ ਤਿੰਨ ਮਨ ਵਸਿਆ ਆਏ ਹਰ ਨਾਮ ਪਵਿੱਤਰ ਹਾਲਾ ਨਾਮ ਦੋਏ ਪਵਿੱਤਲ ਨੇ ਹਾਲਾ ਅਰਕਾ ਦੋ ਹੈ ਦੀ ਇੱਕੋ ਹੀ ਆ ਵੇਚੋ ਪਵਿੱਤਲ ਨੇ ਬੇਟਾ ਇਦਾਂ ਕੀ ਹੁੰਦਾ ਪਵਿੱਤਰ ਕਰਦਾ ਹੈ ਨਾਮ ਜਪਤ ਦੁੱਖ ਜਾਏ हां एनु जप्ण कर गई ਚਲੇ चले जांदा है सारे ओ मेरा रोग त्रिक्ला भूख दुख सब चले जांदे जेण को पूर्व लिखया ਦੇ ਪਹਿਲਾਂ ਹੀ ਲਿਖਿਆ ਹੋਇਆ ਹੈ ਉਦਨ ਹੀ ਲੈ ਕੇ ਆਏ ਨੇ ਅਰ ਫਿਰ ਉਹਨਾਂ ਨੇ ਮਾਗਿਆ ਚੇਤਾ ਸਮਝ ਆਨੀ ਕੁਰਬਾਨੀ ਸੁਣ ਕੇ ਉਹ ਪਹਿਲਾਂ ਲਿਖ ਕੇ ਲਿਆਏ ਸੀ ਪੂਰਵ ਲਿਖਿਆ ਤਿਨ ਮਨ ਵਸਿਆ ਹੈ ਉਹਨਾਂ ਦਾ ਬੰ ਆਪਣੇ ਆਪ ਹੀ ਬਸ ਜਾਂਦਾ ਡਿੱਗ ਜਾਂਦਾ ਜਿੱਥੇ ਲਿਖਿਆ ਆਂਦਾ ਲਿਖ ਕੇ ਲਿਆਇ ਤੇ ਜਾ ਕੇ ਡਿੱਗ ਜਾਂਦਾ ਹਰ ਹਰ ਨਾਮ ਦਾ ਆਪਾਂ ਨੂੰ ਕਲੀਅਰ ਕਰਨਾ ਪੈਣਾ ਜੇ ਆਪਾਂ ਕਹਿੰਦੇ ਇੱਕ ਹੀ ਆ ਉੱਥੇ ਆਪਾਂ ਕਹਿੰਦੇ ਸੀ ਦੋ ਪਦਾਰਥ ਚਾਰ ਪਦਾਰਥ ਬਾਰੇ ਦੱਸੋ ਹਰ ਹਰ ਨਾਮ ਪਵਿੱਤਰ ਹੈ ਨਾ ਨਾ ਹਰ ਨਾਮ ਪਵਿੱਤਰ ਹੈ ਪਵਿੱਤਰ ਕਰਦਾ ਇਹ ਪਵਿੱਤਰ ਕਰਦਾ ਹੈ ਹਰ ਰਾਜ਼ਾ ਨਾਮ ਪਿੱਤਰ ਕਰਦਾ ਪਹਿਲਾਂ ਨਾਮ ਜਪਦੁ ਹੋ ਜਾਏ ਕੀ ਇਹ ਫਿਰ ਹਰ ਨਾਮ ਫਿਰ ਉਹੀ ਹੈ ਗਿਆਨਿੰਗ ਆ ਗਿਆਨ ਹੈ ਅੱਛਾ ਕਹਿੰਦੇ ਸੀ ਹਰ ਤੇ ਹਰ ਨਾਮ ਦੋ ਅਰ ਚਾਰ ਪਦਾਰਥ ਹਰ ਹਰ ਨਾਮ ਧਿਆਏ ਮਨ ਆਪਾਂ ਇੱਥੇ ਕਿਹਾ ਸੀਗਾ ਵੀ ਵਿਹਾਰ ਅਤੇ ਹਰਨਾ ਦੋ ਔਰ ਚਾਰ ਪਦਾਰਥ ਹੋ ਗਏ। ਜੇ ਤੇ ਧਿਆਨ ਦੀ ਗੱਲ ਹੈ ਨਾ ਜੇ ਤੇ ਜਪਣ ਦੀ ਗੱਲ ਹੈ ਹੋਰ ਹੈ ਉਹ ਅਖਰਾਂ ਚ ਜਪਣ ਦੀ ਗੱਲ ਹੈ ਜੇ ਤੇ ਧਿਆਨ ਰੱਖਣਾ ਉਹ ਬਿਨਾ ਕਰਨਾ ਦੇ ਸੁਣਨ ਵਾਲੀ ਦੀ ਗੱਲ। ਜਪੜਾ ਲਾਤੇ ਅੰਤ ਫਰਕ ਪੈਂਦਾ। ਅੱਛਾ ਜੀ। ਧਿਆਨ ਨਾਲ ਵੀ ਰੱਖਣਾ ਕੋਈ ਆਵਾਜ਼ ਸਾਨੂੰ ਸੁਣ ਲਈ ਬਾਹਰ ਉਹ ਜਿਹੜਾ ਹੈਗਾ ਉਹ ਸਾਡੇ ਕੋਲ ਅਖਰ ਨੇ ਸੁਣਿਆ ਉਹਨੂੰ ਜਪਣਾ। ਜਪਣ ਚ ਮਨ ਬੁੱਧੀ ਦਾ ਕੰਮ। ਸੁਣਨ ਦੇ ਮਨ ਬੁੱਧੀ ਦਾ ਕੰਮ। ਉਹ ਨਾਮ ਜਿਹੜਾ ਧਿਆਨ ਨਾਲ ਸੁਣਿਆ ਉਹਨੂੰ ਸਮਝਣ ਦੀ ਲੋੜ ਨਹੀਂ ਉਹ ਸਮਝਣ ਦਾ ਪੇਸ਼ਾ ਨਹੀਂ ਉਹ ਸੋਜੀ ਰੈਡੀमेड ਹੀ ਹੈ ਅੱਛਾ ਜੀ ਉਹ ਜਪਣ ਦਾ ਪੇਸ਼ਾ ਨਹੀਂ ਨਾ ਹੈ ਅਖਨਾਲਾ ਜਿਹੜਾ ਹੈ ਗਿਆਨ ਗਿਆਨ ਜਪਣ ਦਾ ਪੇਸ਼ਾ ਹੈ ਜਪਣਾ ਜਿਹੜਾ ਇਹ ਗਿਆਨ ਦਾ ਪੇਸ਼ਾ ਹੈ ਜਿੰਨ ਕੋ ਪੂਰਵ ਜਿੰਨ ਕੋ ਪੂਰਵ ਲਿਖਿਆ ਜਿਨ੍ਹਾਂ ਨੂੰ ਪੂਰਵ ਲਿਖਿਆ ਹੋਇਆ ਨੇ ਜਿਹੜ ਨੇ ਕਿਆ ਕਰਕੇ ਜੜੇ ਆਏ ਨੇ ਉਹ ਇੱਥੇ ਆ ਕੇ ਭਾਵੇਂ ਵਿੱਚ ਭੁੱਲ ਗਏ ਸੀ ਆਏ ਦਾ ਹੀ ਮਨ ਵਸਿਆ ਹੈ ਉਹਨਾਂ ਦਾ ਮਨ ਟਿਕਦਾ ਉਹ ਦੰਡ ਨੇ ਕਰਕੇ ਆਏ ਸੀ ਐਸ ਮਨ ਨੂੰ ਟਿਕਾਉਣ ਦੇ ਆ ਕੇ ਸੰਗਤ ਮਿਲ ਗਈ ਮਨ ਤਿੰਨ ਮਨ ਵਸਿਆ ਆਏ ਉਹਨਾਂ ਦੇ ਮਨ ਵਿੱਚ ਇਹ ਵਸ ਗਿਆ ਆ ਤੇ ਮਨ ਆਪਣੇ ਅੰਦਰ ਬਸ ਗਿਆ ਅੰਦਰ ਆ ਗਿਆ ਮਨ ਆਪਣੇ ਦੇ ਕੋਲ ਆ ਕੇ ਬਸ ਗਿਆ ਹਿਰਦੇ 'ਚ ਬਸ ਛੱਡ ਕੇ ਮਨ ਆ ਕੇ ਹਿਰਦੇ 'ਚ ਬਸ ਗਿਆ ਟਿਕ ਗਿਆ ਘਰ ਬਸ ਗਿਆ ਅੱਛਾ ਮਨ ਨੂੰ ਸਿਹਾਰੀ ਹੈ ਤਿੰਨ ਮਾਨੀ ਤਿੰਨ ਮਨ ਹੀ ਆਏ ਕੀ ਕਹਾਂ ਕਿ ਮਨ ਦੇ ਵਿੱਚ ਆ ਕੇ ਬਸ ਗਿਆ ਕਿ ਮਨ ਕਿਸੇ ਦੇ ਵਿੱਚ ਜਾ ਕੇ ਬਸ ਗਿਆ ਆਪਣੇ ਮੂਲ ਮਾਨ ਹਿਰਦੇ ਵਿੱਚ ਬਸ ਗਿਆ ਜਾਂ ਨਿਤਕਾਰ ਵਿੱਚ ਬਸ ਗਿਆ ਕਹਿ ਲੋ ਹਾਂਜੀ ਸਤਗੁਰ ਕੈ ਪਾਣੀ ਜੋ ਚੱਲੇ ਤਿੰਨ ਦਾਲ ਦੁੱਖ ਲੈ ਜਾਏ ਸਤਗੁਰ ਦੇ ਪਾਣੀ ਜਿਹੜਾ ਚੱਲਦਾ ਇੱਥੇ ਜਿੱਥੇ ਮਨ ਬਸਦਾ ਏ ਇਹ ਸਤਗੁਰ ਦੇ ਪਾਣੀ 'ਚ ਬਸਦਾ ਇੱਥੇ ਸਤਗੁਰ ਦਾ ਪਾਣੀ ਹੀ ਹੈ ਪਾਣੀ ਦੇ ਬਿਨਾ ਬਸਿਆ ਹੀ ਨਹੀਂ ਜਾ ਸਕਦਾ ਪਾਣੀ ਦੇ ਵਿੱਚ ਜਿਹੜਾ ਬਸਦਾ ਉਹੀ ਬਸਿਆ ਹੋਇਆ ਸਤਗੁਰ ਕੇ ਪਾਣੀ ਜੋ ਚੱਲਿਆ ਤਿੰਨ ਦਾਲ ਦੁੱਖ ਲੈ ਜਾਏ ਉਹਨ ਕੋਈ ਫਿਕਰੇ ਨਹੀਂ ਦੀ ਉਥੇ ਕੋਈ ਉਹ ਦਲ ਦੁੱਖ ਨਹੀਂ ਸੱਚਖੰਡ ਹੈ ਉਹ ਇਹ ਸੱਚਖੰਡ ਹੈ ਸੱਚਖੰਡ ਬਸ ਗਰੰਧਾ ਨਰਾ ਘਟੋ ਕੇ ਬਸਦਾ ਪਾਣੀ ਉਥੇ ਦਲ ਦੁੱਖ ਸਾਰੇ ਲੈ ਜਾਂਦੇ ਨੇ ਸਾਰੇ ਚਿੰਤਾ ਫਿਕਰ ਮਨਮੁਖ ਨੇ ਆਪਣੇ ਪਾਣੀ ਚੱਲਦੇ ਨੇ ਆਪਣੀ ਮਰਜ਼ੀ ਅਨੁਸਾਰ ਕਰਦੇ ਨੇ ਆਪਣੀ ਮਰਜ਼ੀ ਦਾ ਨਾਮ ਜਪਦੇ ਨੇ ਗੁਰਬਾਣੀ ਤੋਂ ਅਲੱਗ ਹੋ ਕੋਈ ਹੋਰ ਆਪਣੀਆਂ ਰਹਿਤ ਮਰਿਆਦਾ ਬਣਾ ਕੇ ਚੱਲਦੇ ਨੇ ਉਹਨਾਂ ਨੂੰ ਕੁਝ ਵੀ ਪ੍ਰਾਪਤੀ ਕੋਈ ਕਿਸੇ ਨੂੰ ਬਰਬਾਣੀ ਨੂੰ ਛੱਡ ਕੇ ਜਿਨ੍ਹਾਂ ਨੇ ਕੋਈ ਹੋਰ ਰਾਹ ਵਿੱਚ ਕੱਢ ਲਿਆ ਨਾ ਆਪਣਾ ਪਾਣਾ ਜਿੱਥੇ ਮਰਿਆਦਾ ਜੋੜ ਲਈ ਰਹਦੇ ਨਾਲ ਰਹਿਤ ਤਾਂ ਗੁਰਬਾਣੀ ਹੈ ਜਿੱਥੇ ਮਰਿਆਦਾ ਆ ਗਈ ਉੱਥੇ ਕੱਖ ਵੀ ਨਹੀਂ ਮਿਲਣਾਗੇ ਸਤਿਗੁਰੂ ਕੁਛ ਨਹੀਂ ਮਿਲਣਾ ਬਰਿਆਦਾ ਵਾਲੇ ਨੂੰ ਕੱਖ ਨਾ ਮਿਲੇ ਨਾ ਮਿਲੇ ਜਿੰਨਾ ਮਰਜੀ ਜੋ ਲਾ ਲੈਣੇ ਆਪਣੇ ਭਾਣੇ ਵਾਲੇ ਨੂੰ ਕੁਛ ਨਹੀਂ ਮਿਲਦਾ ਬਰਿਆਦਾ ਆਪਣਾ ਭਾਣੇ ਉੱਤੇ ਮਨ ਦਾ ਦਖਲ ਹੈ ਕਿੰਨੇ ਨੇ ਪਾਇਓ ਜਨ ਵੇਖੋ ਮਨ ਪਤਿਆਏ ਦੇਖ ਲਓ ਆਪਣੇ ਮਨ ਦੇ ਵਿੱਚ ਆ ਕੇ ਆਪਣੇ ਮਨ ਦੇ ਦੇਖ ਲੈਣ ਜਿੱਤੇ ਵੀ ਇਹ ਬਰਿਆਦਾ ਨੇ ਕਿਸੇ ਨੂੰ ਪ੍ਰਾਪਤ ਹੋਇਆ ਕੁਛ ਹਾਈ ਕੋਰਟ ਚ ਲੈ ਕੇ ਦੇਟਾ ਵੀ ਸਿੱਖਾਇਓ ਨਹੀਂ ਕੋਈ ਇਹਦਾ ਨਾ ਦਿੱਤਾ ਲੈ ਕੇ ਠੀਕ ਹੈ ਜੀ ਜਨ ਨਾਨਕ ਦਾਸੰਦਾਸ ਹੈ ਜੋ ਸਤਗੁਰ ਲਾਗੇ ਪਾਈ ਹਨ ਕਹਿੰਦਾ ਜਿਹੜਾ ਜਾਣ ਉਹਦਾ ਇਹਨੇ ਜਾਣ ਲਿਆ ਆਪਣੇ ਦਾ ਵੀ ਦਾਸ ਹੈਗਾ ਗੁਰੂ ਉਹ ਹੈਗਾ ਸੰਤ ਉਹ ਨਹੀਂ ਹੈਗਾ ਕੋਈ ਸ਼ਹਿਦਾਰ ਕਾਲ ਤੱਕ ਦਾ ਹੋਰ ਕੋਈ ਉਹਦਾ ਕਾਰੀ ਨਹੀਂ ਕੋਈ ਉਹ ਦਾਸੰਦਾਸ ਉਹਦਾ ਦਾਸਾਂ ਦਾ ਵੀ ਦਾਸ ਗੁਰਮੁਖ ਨੇ ਜਿਨ੍ਹਾਂ ਦੀ ਗੁਰਬਾਣੀ ਹੈ ਦਾਸ ਨੇ ਸਭ ਇਹ ਦਾ ਵੀ ਦਾਸ ਹੈ ਦਾਸੰਦਾਸ ਹੈ ਜੋ 사ਗੁਰ ਲਾਗੇ ਪਾਇ। ਕਿ 사ਤਗੁਰ ਦਾ ਸੰਗ ਦੇ ਚੜ੍ਹਨੀ ਲਾਗੇ 사ਤਗੁਰ ਕੇ ਲਾਗਾ 사ਤਗੁਰ ਲਾਗਾ ਪਾਇ। ਪੈਰੀ ਲੱਗਨ ਨਾਲ ਚੜ੍ਹਨੀ ਲਾਗੇ। ਹਾਂਜੀ। ਕਹਿੰਦਾ ਪਾਪ ਜੋ ਉਹਨਾਂ ਦੇ ਦੱਸੇ ਰਸਤੇ ਤੇ ਤੁਰਨ ਲੱਗ ਗਏ ਹਾਂਜੀ। ਹਾਂਜੀ ਹਾਂਜੀ। ਕਿਉਂਕਿ 사ਤਗੁਰ ਦਾ ਕੋਈ ਹੋ ਸ਼ਰੀਰ ਨਹੀਂ ਹੈ ਨਾ ਜੀ। ਬਿਲਕੁਲ। 사ਤਗੁਰ ਤਾਂ ਗਿਆਨ ਸਰੂਪੀ ਹੈ। ਹਾਂਜੀ ਹਾਂ। ਆਉੜੀ ਤੂੰ ਥਾਨ-ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ-ਪਰੰਗ ਸ੍ਰਿਸ਼ਟ ਸਭ ਸਾਜੀ ਬਹੁ-ਬਹੁ ਵਿਧੀ ਭਾਂਤ ਉਪਾਵਣੀ ਕਰਤੇ ਤੂੰ ਤਾਂ ਹਰ ਜਗ੍ਹਾ ਭਰਪੂਰ ਹੈ ਹਰ ਥਾਂ ਦੇ ਵਿੱਚ ਹਰ ਹਿਰਦੇ ਵਿੱਚ ਭਰ ਪੂਰਾ ਕਰ ਰਿਹਾ ਹੈ ਜੀਵ ਨੂੰ ਬੁੱਧੇ ਨੂੰ ਪੂਰੀ ਕਰ ਰਿਹਾ ਹੈ ਸਭ ਤੇਰੀ ਬਣਤ ਬਣਾਵਣੀ ਤੇ ਇਹ ਬਣਤ ਸਾਰੀ ਤੇਰੀਓ ਬਣਾਈ ਹੋਈ ਹੈ ਤੇ ਤੇਰੀਓ ਪੈਦਾ ਕੀਤੀ ਹੋਈ ਹੈ ਸਾਰੀ ਰਾਮ ਦਾ ਰੰਗ ਤੇ ਸਭ ਸਾਜੀ ਦੇਖੋ ਪਾਤ ਰੰਗਾਂ ਦੇ ਨਾਲ ਸਾਰੀ ਸੇਸੀ ਸਾਜੀ ਹੈ ਤਾਂ ਪਾਤ ਪਾਉਂਦੇ ਸ਼ਰੀਰ ਨੇ ਪਾਤ ਪਾਉਂਦੀ ਉਹਨਾਂ ਦੀ ਖੁਰਾਕ ਹੈ ਪਾਤ ਪਾਉਂਦੇ ਉਹਨਾਂ ਦੇ ਰੰਗ ਰੂਪ ਨੇ ਬੋ ਬੋ ਬੋ ਪਾਤੋ ਪਾਵਣੀ ਕਿੰਨੇ ਤਰੀਕੇ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਪੈਦਾ ਕੀਤੀ ਹੋਈ ਹੈ ਕੋਈ ਅੰਡੇਆਂ ਤੋਂ ਕੋਈ ਜੇਰ ਤੋਂ ਕੋਈ ਪਸੀਨੇ ਤੋਂ ਕੋਈ ਉਤਪਜ ਜ਼ਮੀਨ ਚੋਂ ਉਹ ਭਾਈ ਹੋਈ ਪੰਜ-ਪੰਜ ਦੇ ਤਰੀਕਿਆਂ ਨਾਲ ਹਾਂਜੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮੱਤਿ ਮੁਖ ਗੁਰਮੁਖੀ ਹਰ ਸਮਝਾਵਣੀ ਸਭ ਤੇਰੀ ਜੋਤ ਸਾਰਿਆਂ ਤੇਰੀ ਜੋਤ ਹੈ ਜੋਤੀ ਵਿੱਚ ਵਰਤਾ ਤੂੰ ਜੋਤੀ ਦੇ ਵਿੱਚ ਤੂੰ ਹੀ ਵਰਦਾ ਮਨ ਜੋ ਹੁੰਦਾ ਆਪਣੇ ਮਨ ਤੇਰਾ ਜੋਤ ਹੈ ਜੋਤੀ ਵਿੱਚ ਤੂੰ ਆਪ ਹੈ ਗੁਰਮਤਿ ਤੁਦੇ ਲਾਵਣੀ ਗੁਰਮਤਿ ਵੱਲ ਗੁਰਮਤਿ ਵੱਲ ਕੈਉ ਲਾਉਣਾ ਨੂੰ ਮਰੂ ਆਨ ਬੁੱਧ ਨੂੰ ਤੈਨੂੰ ਗੁਰਮਤਿਵ ਲਾਉਣਾ ਤੇਰੀ ਮਰਜ਼ੀ ਹੋਊ ਤੇ ਗੁਰਮਤਿਵ ਲੱਗੂ ਤੇਰੀ ਮਰਜ਼ੀ ਨਹੀਂ ਹੋਊ ਨਹੀਂ ਲੱਗਣਾ ਅੰਦਰ ਦਾ ਤੂੰ ਐ ਤੇਰਾ ਈ ਮਾਨ ਐ ਤੇਰੀ ਉਹ ਬੁੱਧਾ ਗੁਰਮਤਿਵ ਜੇ ਲਾਉਣੀ ਐ ਤੇਰੀ ਈ ਤੇਰੀ ਲਈ ਲੱਗਣੀ ਐ ਜਿਨ ਹੋਏ ਦਿਆਲ ਜਿਨ੍ਹਾਂ ਤੇ ਤੂੰ ਦਿਆਲ ਹੁੰਨਾ ਹੋ ਜਾਂਦੀ ਐ ਤੇਰੀ ਜਿਨ ਸਤਗੁਰ ਮਿਲਦਾ ਸੱਚ ਦਾ ਗਿਆਨ ਪ੍ਰਾਪਤ ਹੋ ਜਾਂਦਾ ਸੱਚ ਦਾ ਗਿਆਨ ਕਰਾਉਣ ਵਾਲਾ ਪ੍ਰਾਪਤ ਹੋ ਜਾਂਦਾ ਹੈ ਮੁਖ ਗੁਰਮੁਖੇ ਹਰ ਸਮਝਾਵਣੀ ਉਹਨਾਂ ਨੂੰ ਗੁਰਮੁਖ ਵੀ ਕੋਈ ਸਮਝਾਉਣ ਆਲਾ ਨਹੀਂ ਜਾਂਦਾ ਮੁਖ ਦੁਆਰਾ ਬੋਲ ਕੇ ਕੋਈ ਗੁਰਮੁਖ ਸਮਝਾਉਣ ਆਲਾ ਵੀ ਨਹੀਂ ਜਾਂਦਾ ਜਿੱਥੇ ਜਿਆਦਾ ਤੇਰੀ ਕਿਰਪਾ ਹੋ ਜਾਂਦੀ ਐਸਾ ਜੋੜ ਮੇਲ ਕਰਨ ਦੀ ਕਿਰਪਾ ਤਾਂ ਹੈ ਪਰਮੇਸ਼ਰ ਦੀ ਹੋ ਜਿੱਤ ਇਟੱਕ ਪਰਮੇਸ਼ਰ ਦੀ ਕਿਰਪਾ ਪਰ ਮੰਨਣਾ ਨਾ ਮੰਨਣਾ ਸਮਝਣਾ ਨਾ ਸਮਝਣਾ ਇਹ ਤੇਰੀ ਹਰ ਦੇ ਹੀ ਹੈ ਹਾਂਜੀ ਠੀਕ ਹੈ ਜੀ ਮੁੱਖ ਜਿਹੜਾ ਹੈ ਉਹ ਹੈ ਕਿ ਕੋਈ ਸਾਹਮਣੇ ਸਾਹਮਣੇ ਬੈ ਕੇ ਸਮਝਾ ਰਿਹਾ ਜੀ ਮੁੱਖ ਗੁਰਮੁਖੀ ਹਰਿ ਸੋਹਣੇ ਹਾਂ ਜੀ ਹਾਂ ਬੋਲ ਕੇ ਸਾਹਮਣੇ ਬੈ ਠੀਕ ਹੈ ਜਿਵੇਂ ਚੌਥੇ ਪਾਤਸ਼ਾਹ ਨੇ ਤੀਸਰੇ ਪਾਤਸ਼ਾਹ ਨੇ ਸਮਝਾਇਆ ਹੋ ਸ਼੍ਰੀ ਰਾਮ ਰਮੋ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਵਣੀ ਆ ਬੋਲੋ ਤਾ ਬੋਲੋ ਕਿਵੇਂ ਬੋਲੋ ਆ ਬੋਲੀ ਬੋਲੋ ਜਿਤ ਰਾਮ ਰਮੋ ਸਤਰੀ ਤੇ ਨਾਲ ਤੁਸੀਂ ਆਪਣੇ ਮੂਹਰੇ ਦੇ ਵਿੱਚ ਹੀ ਲੀਓ ਉਹ ਉਹ ਗੱਲ ਬੋਲੋ ਉਹ ਗੱਲ ਬੋਲੋ ਤਾ ਬੋਲੋ ਰਾਮ ਰਮੋ ਜੋ ਜੋ ਬੋਲਦੇ ਜਾਵੋ ਆਪਣੇ ਮੂਹਰੇ ਚ ਸਮਾਉਂਦੇ ਹੀ ਚਲੇ ਜਾਵੋ ਤੇ ਇਸ ਰਾਮ ਹੈ ਜਿਹੜਾ ਅੰਦਰ ਤੁਹਾਡੇ ਉਹਦੇ ਵਿੱਚ ਰਮਣ ਦੀ ਗੱਲ ਹੈ ਜਿਸ ਗੂਰਤ ਵਿੱਚ ਨਹੀਂ ਰਮਿਆ ਜਾ ਸਕਦਾ ਜਿਦੀ ਰਾਮ ਰਮੋ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਵਲੀ ਰੇਦਰ ਦੁੱਖ ਭੁੱਖ ਸਭ ਲੈ ਜਾਵੇ ਦੂਰ ਹੋ ਜੇ ਪ੍ਰੈਕਟੀਕਲ ਅਦਾਲਤ ਦੁੱਖ ਦੂਰ ਹੁੰਦਾ ਹੈ ਭੁੱਖ ਦੂਰ ਹੁੰਦੀ ਹੈ ਫਿਰ ਤਾਂ ਗੱਲ ਠੀਕ ਹੈ ਜਿਹੜੇ ਰਾਮ ਦੇ ਨਾਲ ਅਮਨ ਦੇ ਨਾਲ ਇਹ ਸ਼ਰਤ ਨਹੀਂ ਨਾ ਪੂਰੀ ਹੁੰਦੀ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਵਣੀ ਉਹ ਰਾਮ ਦੇ ਵਿੱਚ ਰਹਿਣਾ ਨਹੀਂ ਨਾ ਉਹ ਰਾਮ ਹੈ ਨਾ ਉਹ ਪੂਜਾ ਜਾਇ ਨਾ ਉਹ ਦੇ ਨਾਲ ਸੁਰਤ ਜੋੜਨੀ ਜਾਏ ਜੇ ਇਹ ਸ਼ਰਤਾਂ ਨਹੀਂ ਪੂਰੀਆਂ ਕਰਦਾ ਹਾਂ ਠੀਕ ਹੈ ਜੀ ਕਹਿੰਦਾ ਪਾਲ ਵੀ ਪਹਿਲਾਂ ਮੰਨੇ ਰਾਮ ਦੇ ਵਿੱਚ ਰਹਿਣਾ ਹੈ ਜੀ ਰਾਮ ਰਹਿਣਾ ਫੇਰ ਕਹਾ ਜਾ ਕੇ ਉਹ ਉਹਦੀਆਂ ਨਿਸ਼ਾਨੀਆਂ ਨੇ ਰਹਿਣ ਤੇ ਬਾਅਦ ਉਹਨੂੰ ਪ੍ਰਾਪਤੀ ਹੈ ਕੁਝ ਜੇ ਪ੍ਰਾਪਤੀ ਹੈ ਨਹੀਂ ਤਾਂ ਫਿਰ ਉਹ ਕੁਝ ਹੋਰ ਹੈ ਕਰ ਰਿਹਾ ਠੀਕ ਹੈ ਜੀ ਤੇ ਦੁੱਖ ਭੁੱਖ ਦੀ ਗੱਲ ਇਹ ਆਈ ਸੀ ਭੁੱਖਿਆਂ ਭੁੱਖਣਾ ਉਤਰੇ ਹਾਂ ਜੀ ਵੱਡੀ ਗੱਲ ਦੁੱਖ ਭੁੱਖੇ ਆ ਠੀਕ ਹੈ ਤੇ ਭੁੱਖਿਆਂ ਭੁੱਖਣਾ ਉਤਰੀ ਜਾਂਦੀ ਹੈ ਜੀ ਭੁੱਖੇ ਕਾਰਨ ਸਾਡੀ ਜਿਹੜੀ ਧਰਮ ਬਲ ਦੀ ਦਿੰਦੀ ਭੁੱਖੇ ਕੰਮ ਆਇਆ ਜਿਹੜਾ ਧਿਆਨ ਕਰਨੇ ਦੀ ਦਿੰਦੀ ਭੁੱਖੀ ਦੀ ਯੋਜਨਾ ਤੇ ਆ ਨਹੀਂ ਕਰਿਆ ਜਾ ਸਕਦਾ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ